ਤੇ ਲੋਕ ਮਹੱਲਾ ਚੌਥਾ ਕਰ ਕਿਰਪਾ ਸਤਿਗੁਰ ਮਿਲਿਓਨ ਮੁਖ ਗੁਰਮੁਖ ਨਾਮ ਧਿਆਏ ਸੀ ਠੀਕ ਹੈ ਕਰੀ ਕਿਰਪਾ ਸਤਿਗੁਰ ਮਿਲਿਓਨ ਮੁਖੀ ਗੁਰਮੁਖ ਨਾਮ ਆ ਜੇ ਇੱਕ ਵਾਰ ਕਰ ਪੜ੍ਹ ਲਿਆ ਫਿਰ ਆਰਡਰ ਹੋ ਗਿਆ ਇਹ ਫਿਰ ਤਾਂ ਹੁਕਮ ਹੋ ਗਿਆ ਤੂੰ ਕਿਰਪਾ ਕਰ ਮੇਰੇ ਤੇ ਆਪਾਂ ਪੰਜਾਬੀ ਚ ਬੋਲਦੇ ਹਾਂ ਕਰੀ ਜਰਤਾਂ ਗੁਰਮਤਿ ਕੀਤੀ ਤਾਂ ਆਇਬ ਹੋ ਗਿਆ ਠੀਕ ਹੈ ਜੀ ਕਿਰਪਾ ਸਤਗੁਰ ਮੇਲਿਓ ਨਾ ਸਤਗੁਰ ਨੇ ਕਿਰਪਾ ਕਰੀ ਮੈਨੂੰ ਆਪਣੇ ਨਾਲ ਬੁਲਾ ਲਿਆ ਕਰੀ ਕਿਰਪਾ ਸਤਗੁਰ ਨੇ ਐਸੀ ਕਿਰਪਾ ਕਰੀ ਮੈਨੂੰ ਆਪਣੇ ਨਾਲ ਹੀ ਬੁਲਾ ਲਿਆ ਦੇਖੋਗੇ ਨਾਮ ਤੇ ਆਇਆ ਸੀ ਉਹ ਜਿਹੜਾ ਮੂੰਹ ਦੇ ਵਿੱਚ ਹੋਰ ਪਹਿਲਾਂ ਬੋਲਦਾ ਸੀ ਮਨ ਬੋਲਦਾ ਸੀ ਨਾ ਮਨ ਕੁਝ ਹੋਰ ਅਡਵੋਕਾਂ ਦੀ ਅਬਦੀ ਛੋ ਉਹ ਛੁੱਟ ਗਈਆਂ ذوق وچ ਧਿਆਨ ਹੋ ਗਿਆ ਸ਼ਬਦ ਵਿਚਾਰ ਚ ਧਿਆਨ ਚ ਲੱਗ ਗਿਆ ਠੀਕ ਹੈ ਜੀ ਧਿਆਨ ਸੋ ਕਰੇ ਜੇ ਸਤਗੁਰ ਭਾਵਸੀ ਸੀ ਕਰਦਾ ਕੀ ਹੈ ਕਰਦਾ ਜੋ ਸਤ ਜੇੰਦਾ ਲੱਗਦਾ ਉਹ ਕਰਦਾ ਪਹਿਲਾ ਕਰਦਾ ਸੀ ਜੋ ਆਪਣੇ ਆਪਣੀ ਮਨ ਨੂੰ ਚੰਗਾ ਲੱਗਦਾ ਸੀ ਖੁਦ ਨਹੀਂ ਕਰਦਾ ਬੋਦੀ ਜਿੰਦਾ ਲੰਗੇ ਕਾਇਦਾ ਲੱਗੇ ਆਪਣੇ ਛੱਦ ਗੁਲ ਨੂੰ ਜੇ ਤੰਗ ਲੱਗੇ ਉਹ ਕਰਦਾ ਠੀਕ ਹੈ ਜੀ ਮੰਨ ਤੇ ਤੋਂ ਮਨ ਨੂੰ ਗਲਾਬ ਬਣਾਉਣਾ ਬੁੱਧੀ ਮਨ ਦੀ ਗੁਲਾਮ ਹੈ ਮਨ ਰਾਜਾ ਬਣੇ ਅਨੁਗਵਾਸੀ ਰਾਜਾ ਮਨ ਮਾ ਰਾਜਾ ਮਾ ਬਾਸੀ ਹੁੰਦਾ ਹੈ ਅੱਖੀ ਹੋਇਆ ਹੋਇਆ। ਖਾ ਗੋ ਪੜਾਉਣਾ ਮੰਨੋ ਇਹ ਦੇ ਗੁਲਾਮ ਬੜਨਾ ਦੀ। ਕਰਕੇ ਸਤਗੁਰ ਸਤਗੁਰ ਨੂੰ ਕੋਲਦਾ ਜਿਹੜਾ ਜੋ ਗੁਰਬਾਣੀ ਕਹਿੰਦੀ ਉਹ ਉਹ ਵੀ ਚੰਗਾ ਠੀਕ ਹੈ। ਉਹ ਕਰੇ ਜੀ ਸਤਗੁਰ ਭਾਵਸੀ ਗੁਰ ਪੂਰਾ ਘਰੇ ਵਸਾਏ ਸੀ। ਸਾਵੇਂ ਫੇਰ ਗਿਆਨ ਪੂਰੇ ਦਾ ਪੂਰਾ ਘਰ ਵਸੂਗਾ ਤਾਂ ਚੱਲਣ ਚਾਲਣ ਸਾਰਾ ਇਹਦਾ ਕੀ ਹੋਊਗਾ? ਰੰਗ का मन ਦਾ जैसे ਪ੍ਰਗਲ ਜੈਸੇ ਤਾਰ ਉੱਪਰ ਆਕਾਰ ਪੂਰੇ ਦਾ ਪੂਰਾ ਗਿਆਨ ਆਪਣੇ ਅੰਦਰ ਸਿੱਖ ਜਾਊਗਾ ਪੂਰਾ ਚਾਣ ਹੋ ਜਾਊਗਾ ਜਿਨ ਅੰਦਰ ਨਾਮ तिनका ਹੈ ਤਿੰਨ ਕਾ ਭਉ ਸਭ ਗਵਾਏ ਸੀ ਜਿਹਦੇ ਅੰਦਰ ਲੋਭ ਦਾ ਖਿਆਲ ਨਾ ਹੈਗਾ ਡਰ ਚੱਕਦੇ ਦਾ ਪਹਿਲਾ ਹੁੰਦਾ ਡਰ ਕੇ ਮਿਲ ਚਾ ਕੋਈ ਨਾ ਨੋਏ ਵਿਸ਼ਵਾਸ ਭਰੋਸਾ ਹੁੰਦਾ ਵੀ ਹੁਕਮ ਦੇ ਵਿੱਚ ਨਾ ਕੁਝ ਵੀ ਨਹੀਂ ਹੁੰਦਾ ਠੀਕ ਹੈ ਹੁਕਮ ਦੇ ਕਹਿੰਦੇ ਨੇ ਜਿਆ ਹੋਏ ਕਿ ਤਾ ਤਾਂ ਦਰੀਏ ਨਾ ਕੋਈ ਹੁਦਯੋਦੀ ਹੁਕਮ ਪਰਮੇਸ਼ਰ ਦਾ ਪਰਮੇਸ਼ਰ ਤੇ ਹੁਕਮ ਤੋਂ ਤਾਂ ਨਾ ਕੋਈ ਆਈਦਾ ਉਹ ਤਾਂ ਉਹ ਤਾਂ ਨਾਲ ਉਹ ਤਾਂ ਚੱਕਰ ਵਾਲੀ ਚੀਜ਼ ਹੈ। ਠੀਕ ਹੈ। ਆਪ ਹੋਏ ਹੋਰ ਕੀਤੀ ਝੱਕ ਝੱਕ ਜਾਏ ਆਪੇ ਉਹ ਰਖਣ ਵਾਲਾ ਹੈਗਾ ਜੇ ਤੂੰ ਮੇਰੇ ਵੱਲ ਹੈ। ਤੇ ਫਿਰ ਚੱਕ ਮਾਰੀ ਜਾਂ ਲੋਕ ਜਿਉਂ ਗਰਜੀ ਕਰੀ ਜਾਂ ਉਹਦਾ ਕੌਲ ਵਾਲ ਬਿੱਗਾ ਸਾਧੂ ਜਿੰਨੇ ਜਿੰਨੇ ਪਰਮੇਸ਼ਰ ਇਸ ਗੱਲ ਦਾ ਜਿਹਨੂੰ ਪ੍ਰੋਪਾ ਹੋ ਜਾਂਦਾ ਜਿਹੜੇ ਗੁਰਬਾਣੀ ਨੇ ਉਹਨਾਂ ਨੂੰ ਫੇਰ ਦਾਲ ਨਹੀਂ ਦਿੰਦਾ ਉਹ। ਠੀਕ ਹੈ ਅਗਰੇ ਵਾਲੀ ਜਾਈਦਾ ਗੱਲ ਵੀ ਠੀਕ ਹੈ ਜੇ ਗੱਲ ਸੱਚ ਹੈ ਗੁਰਬਾਣੀ ਦਾ ਸੱਚ ਹੈ ਉਹ ਸਾਨੂੰ ਸੱਚ ਲੱਗੇ ਚਾਹੇ ਨਾ ਲੱਗੇ ਲੱਗ ਗੱਲ ਗੁਰਬਾਣੀ ਜੋ ਕਹਿੰਦੀ ਹੈ ਤਾਂ ਸੱਚ ਹੈ ਤਾਂ ਹੀ ਕਿਹਾ ਹੋਇਆ ਇੱਥੇ ਆ ਕੇ ਆਦਮੀ ਮੁਸ਼ਕਲ ਹੋ ਜਾਂਦੀ ਹੈ ਸਾਰਿਆਂ ਨੂੰ ਭਰੋਸਾ ਕਰਨਾ ਇੱਥੇ ਆ ਕੇ ਮੁਸ਼ਕਲ ਬਣਦੀ ਹੈ ਤਾਂ ਕਿਹਾ ਵੀ ਗੁਰਬਾਣੀ ਨੂੰ ਸਤ ਸਤ ਕਰਕੇ ਬੁੱਧੂ ਗੁਰ ਸਿੱਖੋ ਜੇ ਇੱਥੇ ਆ ਕੇ ਆ ਗੱਲ ਬੋਲ ਲਈ ਨਾ ਫੇਰ ਕਰ ਚੱਕੋ ਠੀਕ ਹੈ ਜਨ ਨਾਨਕ ਾਮ ਧਿਆਇ ਤੂੰ ਹਲਕ ਪਲਤ ਛੁਡਾਈ ਬੰਦੇ ਨਾਨਕ ਕਹਿੰਦਾ ਤੂੰ ਲੋਭ ਤੇ ਧਿਆਨ ਲੱਕ ਹੁਕਮ ਦੇ ਧਿਆਨ ਲੱਕ ਤਰਕੀ ਲੈ ਜੋ ਹੋ ਰਿਹਾ ਹੁਕਮ ਹੋ ਰਿਹਾ ਹੁਕਮ ਤੇ ਬਿਨਾਂ ਕੋ ਚੜ ਦੰਡੀ ਲੋੜ ਨਹੀਂ ਕਿਤੇ ਚਿੰਤਾ ਕਲ ਦੀ ਲੋੜ ਨਹੀਂ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਇਹ ਹਰਿਆਲ ਦੀ ਬੱਚੇ ਦੀ ਉਹ ਕਾਹਦੀ ਚਿੰਤਾ ਕਰਦਾ ਤੂੰ ਉਹਦੇ ਹੁਕਮ ਦੀ ਧਿਆਨ ਨਾਲ ਜਿੰਨਾ ਹੁਕਮ ਆਵੇ ਚੱਲ ਜਿੰਵੀ ਚਲਾਉਂਦਾ ਉਹ ਵੀ ਚੱਲ ਹਾਂਜੀ ਹਾਂਜੀ ਨਾਮ ਧਿਆਏ ਤੂੰ ਹਰ ਹਲਤ ਪਲਤ ਛੋੜਾਈ ਸੀ ਉਹ ਇੱਥੋਂ ਆਰ ਉੱਥੋਂ ਦੁਨੀਆਂ ਦਾ ਮਤੇ ਜਲਾਦਾ ਹਲਤਾ ਤੇ ਵੀ ਜਲਾ ਲੈਣਗੇ ਤੇ ਵੀ ਜਲਾ ਲੈਣਗੇ ਠੀਕ ਹੈ ਮਹੱਲਾ ਚੌਥਾ ਗੁਰ ਸਿੱਖਾਂ ਕੈ ਮਨ ਭਾਵ ਦੀ ਗੁਰ ਸਤਗੁਰ ਨੇ ਦੇਖੋ ਜਿਹੜੇ ਗੁਰ ਨੇ ਉਹਨਾਂ ਦੇ ਅਜੜੀ ਵਡਿਆਈ ਹੈ ਨਾ ਗੁਰਬਾਣੀ ਗੁਰ ਸਤਗੁਰ ਕੀ ਦੀ ਵਡਿਆਈ ਹੈ ਨੀ ਗੁਰੂ ਗੰਨੂ ਦੀ ਵਡਿਆਈ ਤੇ ਲੱਗਦੀ ਜੋ ਗੁਰ ਸਤਗੁਰ ਨੇ ਵਡਿਆਈ ਕੀਤੀ ਹੈ ਦੀ ਉਹਨਾਂ ਨੂੰ ਬੜੀ ਜੰਗੀ ਲੱਗਦੀ ਹੈ ਉਹਨਾਂ ਦੀ ਕੀਤੀ ਹੋਈ ਐ ਆਨੰਦਕਨ ਨੇ ਵਡਿਆਈ ਜੋ ਕੀਤੀ ਐ ਉਹਨਾਂ ਨੂੰ ਬਹੁਤ ਅੰਗੀ ਲੱਗਦੀ ਐ ਠੀਕ ਐ ਜੀ ਕੀ ਮਤਲਬ ਬਿਹਾਰੀ ਨਾਲ ਐ ਤਾਂ ਗੁਰੂ ਸਤਗੁਰ ਸਤਗੁਰ ਕੀ ਵਡਿਆਈ ਜੋ ਉਹਨਾਂ ਨੇ ਕੀਤੀ ਹੋਈ ਵਡਿਆਈ ਠੀਕ ਐ ਜੀ ਕੀ ਕੀ ਹੋਊ ਨਾਲ ਹਾਂਜੀ ਹਾਂਜੀ ਹੋਈ ਵਡਿਆਈ ਜਿਹੜੀ ਉਦੋਂ ਦੀ ਠੀਕ ਐ ਜੀ ਨਹੀਂ ਵਡਿਆਈ ਹੁੰਦਾ ਸਤਗੁਰੂ ਦੀਵੜੇ ਆਯੁੱਧ ਹਾਂ ਹੋਜੀ ਠੀਕ ਹੈ ਜੀ ਹਰ ਰੱਖ ਹਰ ਰੱਖੋ ਪੈਜ ਸਤਗੁਰੂ ਕੀ ਨਿਤ ਚੜੇ ਸਵਾਈ ਹੈ ਹਰ ਸਤਗੁਰੂ ਕੀ ਪੈਜ ਰੱਖੋ ਸਾਡਾ ਰੱਖੋ ਪੈਜ ਸਤਗੁਰੂ ਕੀ ਸਤ ਦਾ ਗਿਆਨ ਹੈ ਜਿਹੜਾ ਲੈ ਲਿਆ ਇੱਥੇ ਸਤਗੁਰੂ ਗੁਰੂ ਪ੍ਰਵੇਸ਼ਲ ਦੀ ਚਾਹ ਹਨ ਬੇ ਅੱਛਾ ਜੀ ਜਿਹੜਾ ਭਾ ਕੇ ਹੱਦਤਾ ਹੈ ਬੇ ਗੈਰ ਲਿਆ ਸਚਨਾ ਇਹਦੀ ਹੁ ਤੂੰ लाज ਵਾ ਤੇ ਢੋਲੇ ਨਾ ਤੇਰੇ ਕੋਲ ਪਹੁੰਚਵੇ ਇਹ ਕੋਲ ਲਿਆ ਜਾਂਦਾ ਹੈ ਕਰਦਾ ਇਹ ਪਰ ਦੂਰ ਕਰਦਾ ਹੈ ਦਾ ਨਾਸ ਕਰਦਾ ਗੁਰਪ੍ਰਸਾਦ ਧਰਮ ਦਾ ਨਾਸ ਇਹਦੀ ਪੈਜ ਰੱਖ ਪਰਮ ਦਾ ਮੇਰੇ ਤੋਂ ਵਾਸ ਕਰ ਨਾ ਰਹੇ ਵੀਰੇ ਅੰਦਰ ਹਾਂਜੀ ਗੁਰ ਸਤ ਗੁਰ ਮਨੀ ਪਾਰ ਬ੍ਰਹਮ ਹੈ ਛਡਾਈ ਆ ਦੇਖੋ ਗੁਰ ਸਾਧਗੋ ਦਾ ਜਿਹੜਾ ਉਹਦੇ ਮੂਦੇ ਵਿੱਚ ਕੀ ਆ ਉਹਦੇ ਪਾਰ ਬ੍ਰਹਮ ਹੁਣ ਪਾਰ ਬ੍ਰਹਮ ਜਿੰਦਾ ਆ ਗਿਆ ਲਾ ਪਾਰ ਬ੍ਰਹਮ ਸ਼ਬਦ ਗੁਰ ਠੀਕ ਉਹ ਹੈ ਉਹਦੇ ਮੂਦੇ ਵਿੱਚ ਫਰ ਗਿਆ ਠੀਕ ਜੀ ਤੇ ਫਾਰਬਰ ਉਹਦੇ ਦੋ ਦੋ ਵਿਚ ਤਾਂ ਫਾਰਬਰ ਨਾ ਆ ਉਹ ਬੁਲਾਉਂਦਾ ਤੇ ਉਹ ਬੋਲਦਾ ਤੇ ਬੋਲਦਾ ਗੁਰ ਸਤਗੁਰ ਤਾਣ ਦੀ ਬਾਣ ਹਰ ਤਿੰਨ ਸਭ ਆਣ ਨਿਭਾਈ ਆ ਗੁਰ ਸਤਗੁਰ ਤਾਲਦਵਾਨ ਹਰ ਆਪੇ ਕੋਈ ਰੂਪ ਜਿਹੜਾ ਹਾਲ ਹੈ ਜਿਹੜਾ ਉਹੀ ਸ਼ਬਦ ਗੁਰੂ ਚ ਲੀਡ ਕੇ ਸਿੱਕੋ ਜਾਂ ਦਰਿਆ ਸਮੁੰਦਰ ਦੇ ਵਿੱਚ ਪੈ ਗਿਆ ਜਾ ਕੇ ਜਿੱਥੇ ਸਮੁੰਦਰ ਦੇ ਨਾਲ ਜੁੜ ਜਾਂਦਾ ਦਰਿਆ ਜਾ ਕੇ ਉੱਤੇ ਚਾਹੇ ਉਹਨੂੰ ਦਰਿਆ ਨੰਗਾ ਕਹਿ ਲੋ ਚਾਹੇ ਉਹਨੂੰ ਸਮੁੰਦਰ ਕਹਿ ਲੋ ਗੱਲ ਜਾ ਦੋਏ ਜੁੜ ਜਾਣ ਜਿੱਥੇ ਜੁੜ ਕੇ ਜਾ ਕੇ ਦੋਏ ਉਹਨੂੰ ਚਾਹੇ ਦਰਿਆ ਕਹ ਲੋ ਚਾਹੇ ਤੂ ਸਮੁੰਦਰ ਕਹ ਲੋ ਰੁਕ ਦੋ ਉੱਤੇ ਕੇ ਪਾਣੀ ਕੇ ਦੋ ਰੁਕ ਗਏ ਟਿੱਕੇ ਗਾਲ ਸ਼ਬਦ ਗੁਰੂ ਤੇ ਲੀਡ ਹੋ ਗਿਆ ਨਾਂ ਜੁੜ ਗਿਆ ਫਿਰ ਚਾਹੇ ਉਹਨੂੰ ਗੁਰੂ ਕਹ ਲੋ ਚਾਹੇ ਉਹਨੂੰ ਪ੍ਰੋਫੈਸਰ ਕਹ ਲੋ ਚਾਹੇ ਉਹਨੂੰ ਸਤਪੁਰ ਕਹ ਲੋ ਚਾਹੇ ਉਹਨੂੰ ਕੋਈ ਸ਼ਬਦ ਇੱਕੋ ਆ ਸੇ ਹਾਂਜੀ ਜਿਨੀ ਡਿੱਠਾ ਮੇਰਾ ਸਤਿਗੁਰ ਭਾਉ ਕਰ ਤਿੰਨ ਕੇ ਸਭ ਪਾਪ ਗਵਾਈਂ ਹਾਂ ਜਿ ਡਿੱਠਾ ਮੇਰਾ ਸਤਿਗੁਰ ਭਾਉ ਕਰ ਜਿਉ ਮੇਰਾ ਸਤਿਗੁਰ ਸਮੇਲਿਆ ਪੌਰ ਰੱਖ ਕੇ ਨਾ ਪ੍ਰੀਤ ਰੱਖ ਕੇ ਹਾਂਜੀ ਉਹਨਾਂ ਦਾ ਸਾਰਾ ਜਿਹੜਾ ਦੁੱਖ ਟੱਕੇ ਗਏ ਉਹਨਾਂ ਦਾ ਸਾਰਾ ਡਰ ਟੱ ਗਿਆ ਉਹਨਾਂ ਦੇ ਸਾਰੇ ਕਲੇਸ਼ ਟੱਕੇ ਗਏ ਠੀਕ ਹੈ ਸਾਲਾ ਗੱਤਲ ਬੈਠੀ ਆ ਜਿਹਨੇ ਸਮਝ ਲਿਆ ਕਿਸੇ ਬੰਦੇ ਨੂੰ ਸਮਝ ਲੈਣ ਹੋ ਜਣਾ ਹੈਗਾ ਉਹਦੇ ਜਿੱਦੀ ਹੀ ਯਕਨ ਹੋ ਜਾਂਦੀ ਹੈ ਉਹਦੇ ਵਰਗਾ ਹੀ ਹੋ ਜਾਣਿਆ ਦੇਖੋ ਚੰਪੀ ਜਿਹਨੇ ਜਾਣਿਆ ਉਹ ਲਿਆ ਸਤਗੁਰੂ ਨੂੰ ਸਤਗੁਰੂ ਵਰਗਾ ਹੀ ਹੋ ਗਿਆ ਲੈ ਇਹਨਾਂ ਨੂੰ ਜਾਣ ਲਿਆ ਕਿ ਬ੍ਰਿਲੀਅੰਟ ਲੈਣਾ ਨਾੜਕੇ ਬਣ ਗਿਆ। ਨਾਂਕਾ ਜੇ ਤਾਂ ਲੈਣੀ ਨੂੰ ਪਹਿਲਾਂ ਜਾਣ ਲਿਆ ਸੀ ਵੀ ਕੀ ਅਵਸਥਾ ਕਿੰਦੀ ਹੈ। ਛੋਟੀ ਹੈ। ਪਰ ਲੈਣਾ ਨੂੰ ਕਾਫੀ ਦੇਰ ਉੱਤੇ ਰਹਿ ਕੇ ਨਰਕ ਦੀ ਅਵਸਥਾ ਦਾ ਪਤਾ ਲੱਗਿਆ ਕਿੱਥੇ ਹੈ। ਇਹ ਵੀ ਗੁਰ ਮੰਗਰ ਦਾ ਆਸਰ ਮੁੱਤੇ ਰਹਿ ਕੇ ਪਤਾ ਲੱਗਿਆ ਉਹ ਅਵਸਥਾ ਦਾ। ਉਹ ਅਵਸਥਾ ਜੋ ਸਮਝ ਗਿਆ ਉਹ ਵੀ ਨਾਂਕਾ ਕਿਹਾ ਉਹ। ਇਸ ਰੀਕੇ ਨਾਲ ਤੇ ਵਿੱਚ ਵੀ ਗੱਲ ਆਊਗੀ ਕਿ ਜਿੱਤੇ ਦਾ ਹੁੰਦੇ ਅਸੀਂ ਕਹਾਂਗੇ ਵੀ ਜਾ ਕੇ ਦੇਖਿਆ ਖਾਲ ਉਹ ਤਾਂ ਫਿਰ ਗੱਲ ਵੱਢੀ ਠੀਕ ਹੈ ਪਾਓ ਖਾਲ ਕਿ ਲਈ ਤਾਂ ਹੋਈ ਦੀ ਕਰਕੇ ਪ੍ਰੇਮ ਰੱਖ ਕੇ ਸਮਝੇ ਪਹਿਲੂ ਤੇ ਕਿਨ ਕੇ ਸਭ ਪਾਪ ਜੀ ਹਰ ਦਰਗਹ ਤੇ ਮੁਖ ਉਜਲੇ ਬਹੁ ਸ਼ੋਭਾ ਪਾਈ ਆ ਉਹੀ ਗੱਲ ਆ ਗਈ ਨਾ ਅੱਜ ਦਰਗਾਹ ਤੇ ਨੂੰ ਖੁਜਲੇ ਉਹ ਤਾਂ ਸੋ ਪੁੱਛਦਾ ਹੀ ਰਹੂ ਦਰਗਾਹਾਂ ਦੇ ਵਿੱਚ ਆ ਕਰ ਲਈ ਬਸ ਠੀਕ ਆ ਜਨ ਨਾਨਕ ਮੰਗੇ ਧੂੜ ਤਿੰਨ ਜੋ ਗੁਰਕੇ ਸਿੱਖ ਮੇਰੇ ਭਾਈ ਜਨਨ ਰੋਨ ਨੀ ਧੂੜ ਮੁਦਾ ਕੀ ਵੀ ਜਿਹੜੇ ਗੁਰਕੇ ਸਿੱਖ ਨੇ ਮੈਨੂੰ ਗੁਰਕੇ ਸਿੱਖ ਕੋਲ ਵੀ ਉਹੀ ਧੂੜ ਹੈ ਜਿਹੜੀ ਲੈ ਕੇ ਆਇਆ ਗੁਰੂ ਘਰ ਤੋਂ ਨਾ ਤਾਂ ਉਹੀ ਹੈ ਧੂੜ ਜਾਂਦੀ ਹੁੰਦੀ ਹੈ ਜਿਵੇਂ ਮੇਰੀ ਚਲਦੀ ਹੈ ਨਾ ਕੁਝ ਮਿੱਟੀ ਆਉਂਦੀ ਹੈ ਆਪਨੇ ਹਵਾ ਤੇ ਚਲਦੀ ਹੈ ਫਿਰ ਉੱਥੇ ਜਗਵੀ ਕਹਿੰਦਾ ਦੇਖੋ ਭਾਈ ਗਿਆਨ ਕੀ ਆਈ ਆਪਦੀ ਉਹ ਗਿਆਨ ਗਿਆਨੀ ਹੈ ਮੋਲਦਾ ਜਦ ਕਬੀਰ ਉਹ ਗਿਆਨ ਗਿਆਨੀ ਉਹ ਗਿਆਨ ਹੈ ਉਹ ਗਿਆਨ ਨੂੰ ਢੋੜਦਾ ਜਾ ਕੇ ਉਹਨਾਂ ਦੇ ਉੱਤੇ ਧੂੜ ਢੋੜ ਕੇ ਆਇਆ ਹੈ ਤੇ ਇਹ ਜਿਹੜੀ ਧੂੜ ਸੱਤੀ ਧੂੜ ਆ ਖਲਾਈ ਹੈ ਇਹਦੇ ਧੂੜ ਜਿਹੜੀ ਅਸੀਂ ਮਿੱਟੀ ਵੀ ਕਹਿੰਦੇ ਹਾਂ ਉਹਨੂੰ ਖੇ ਗਿਆ ਹੈ ਕਬੀਰ ਨੇ ਖੇ ਗਿਆ ਹੈ ਜੋタルੀ ਵਿਖੇ ਜੋੜਾ ਪਿਆ ਮਤਲਬ ਹੈ ਇਹ ਹੈ ਜਨ ਨਾਨਕ ਜੇ ਰੋੜਾ ਵੀ ਤੂੜੀ ਆ ਤਾਂ ਖੇ ਬਣਦੀ ਆ ਤੇ ਜਿਹਨੂੰ ਖੇ ਗਿਆ ਇਹ ਇਹ ਹੈ ਉਹ ਧੂੜ ਹੈ ਜਲ ਵੀ ਧੂੜ ਥੱਲੇ ਧੂੜ ਕੁਰੀਤ ਤੇ ਜੰਗਵਾਂ ਹਾਂਜੀ ਧੂੜ ਤਾਂ ਕੁਰੀਤ ਕੀ ਜੰਗਵ ਜਨ ਨਾਨਕ ਮੰਗੈ ਧੂੜ ਤਿੰਨ ਜੋ ਗੁਰ ਕੇ ਸਿੱਖ ਮੇਰੇ ਭਾਈ ਵੇਖੋ ਭਾਈ ਜਿਹੜੇ ਗੁਰਪ੍ਰਸਾਦ ਕਰਨ ਦੇ ਵੀਡੀਓ ਨਾਲ ਤੋਂ ਥੋੜ੍ਹਾ ਜਿਹਾ ਉਹਨੇ ਜਿਹੜਾ ਸੁਣ ਕੇ ਆਏ ਕੋ ਗਿਆਨ ਬਿਲੂਪੀ ਚੰਗਾ ਲੱਗਦਾ ਕੋਈ ਗੱਲ ਬਾਬੇ ਉਹਨਾਂ ਨੂੰ ਆਪਣੇ ਭਾਈ ਹਾਂ ਭਾਈ ਸੁੱਧੇ ਹੀ ਰਸਤਾ ਜੋ ਬਾਤ ਸੁਣਾਵੇ ਵੀਰ ਇਹ ਇੱਥੇ ਭਾਈ ਨਹੀਂ ਹੋਣਾ ਸਾਲ ਵਿਰਗਾਂ ਦੇ ਕਿ ਜਾ ਕੇ ਇੱਕ ਸਾਲ ਵੀ ਹੋ ਸਕਦੇ ਉੱਥੇ ਦੋਨ ਕੋਈ ਵੀ ਹੁੰਦਾ ਕੋਈ ਉਹਦਾ ਸਮਰਾਪਨ ਦੇ ਇਹ ਇੱਥੇ ਗੁਰੂ ਚੇਲੇ ਨੂੰ ਵੀ ਦਰਗਾਹ ਨਹੀਂ ਗੁਰੂ ਚੇਲੇ ਹੀ ਰਹੂਗੇ ਜਾ ਕੇ ਹਾਂਜੀ ਠੀਕ ਸਿਫਤ ਸਲਾ ਸੱਚੇ ਦੀ ਆ ਦਸਤੀ ਹੈ ਤੁਹਾਨੂੰ ਠੀਕ ਹੈ ਸਲਾ ਹੀ ਸਿਫਤ ਸੱਚੇ ਸੱਚੇ ਹਾਂ ਆਖੀ ਸਲਾਹੀ ਸਿਫਤ ਸੱਚ ਤਜ ਸੱਚੇ ਕੀ ਵਡਿਆਈ ਇਹ ਸੱਚ ਸੱਚੇ ਦੀ ਵਡਿਆਈ ਹੈ ਜਿਹੜੀ ਮੈਂ ਆਖੀ ਹੈ ਹੋਰ ਕਿਸੇ ਦੀ ਵਡਿਆਈ ਨਹੀਂ ਮੈਂ ਆਖੀ ਕਿਸੇ ਬੰਦੇ ਦੀ ਵਡਿਆਈ ਨਹੀਂ ਹੈ ਠੀਕ ਹੈ ਜਿਹੜਾ ਫੱਟ ਸਾਹਮਣੇ ਦਾ ਖਾਕ ਉਹਦੀ ਵਡਿਆਈ ਕਿਸੇ ਆਦਮੀ ਦੀ ਵਡਿਆਈ ਨਹੀਂ ਹੈ ਸਲਾਹ ਹੀ ਸੱਚ ਸਚ ਸੱਚ ਸੱਚ ਕੀਮਤ ਕਿਨੇ ਨਾ ਪਾਈ ਸਲਾਹ ਹੀ ਸੱਚ ਉਹ ਸਾਨੂੰ ਉਹਨਾਂ ਨੂੰ ਕਹਿਆ ਬੰਦੇ ਨੂੰ ਕਹਿਆ ਵੀ ਸਲਾਹ ਐਸੀ ਨਹੀਂ ਸਲਾਹ ਹੀ ਐਵੀਂ ਜਿਪ ਸਲਾਹ ਕਹਿਣ ਦਾ ਮਤਲਬ ਸਾਡੀ ਨਾਲ ਗੱਲ ਲੱਗ ਜੇ ਸਾਡੇ ਬਗਰੋਂ ਠੀਕ ਹੈ ਸਲਾਹ ਸੱਚ ਆਹੋ ਸਲਾਹ ਸੱਚ ਸੱਚ ਦੀ ਉਹ ਕਰੀ ਵੀ ਉਹਦੀ ਸਕਲ ਸਮਨਾ ਦਾ ਖਾਸਬਰੇ ਫਿਰ ਉਹ ਕਮਕਾਨ ਨੂੰ ਕੀ ਕੀਤਾ ਗੁਰਬੰਧ ਜਿਹਾ ਸੀ ਕੀ ਕਰਦੇ ਬਸ ਠੀਕ ਹੈ ਹੈ ਜੇ ਨੂੰ ਫਿਰ ਉਹੀ ਅਰਥ ਆ ਜਾਊਗਾ ਸਾਡੇ ਕੋਲ ਜੋ ਸਾਡੀ ਬੇਟ ਆ ਜੂਗੀ ਉਹ ਰਸਤਾ ਵੀ ਪ੍ਰਾਪਤ ਹੋਣ ਲੱਗ ਜੂਗੀ ਜਿਹੜੀ ਉਹਨੂੰ ਪਿੱਛੇ ਰਹੀ ਹੈ ਹੋ ਸਕਦੀ ਹੈ ਠੀਕ ਹੈ ਜੇ ਕੋਈ ਕਮਾਈ ਕਰੂਗਾ ਵਜੂਦਾ ਜੇ ਲੋਈ ਕਰੂਗਾ ਬਾਕੀ ਜੰਮਣ ਤੇ ਖੋਜੀ ਸੱਚ ਕੀਮਤ ਕਿਨੇ ਨਾ ਪਾਈ ਫਤਲੀ ਕੀਪਤੀ ਤੇ ਸੱਜਣ ਸਹੀ ਪਾਈ ਠੀਕ ਹੈ ਸੱਚ ਕੋਲ ਬਕਾ ਸਾਰਾ ਝੂਠ ਹੈ ਕੂੜ ਰਾਜਾ ਕੂੜ ਪਰਿਆ ਕੂੜ ਤੋਂ ਇੱਕ ਸੱਚ ਝੂਠ ਠੀਕ ਹੈ ਜੀ ਸੱਚ ਸੱਚਾ ਰਸ ਜਿਨ ਚਾਖਿਆ ਸੇ ਤ੍ਰਿਪਤ ਰਹੇ ਆਗਾਈ ਉਡੀ ਗੁਰਬਾਣੀ ਦੀ ਜਿਹੜੀ ਮੂਰਤ ਭਾਵਨਾ ਹੈ ਨਾ ਅਸਲੀ ਵਿਚਾਰਤਾ ਹੈ ਹਾਂਜੀ ਜੋ ਉਹ ਜੇ ਕਿਸੇ ਨੂੰ ਸਮਝ ਨਹੀਂ ਰੋ ਉਹਨੂੰ ਸਮਝ ਆ ਗਈ ਉਹ ਰਾਖ ਚ ਰਹੇਗਾ ਸੇ ਤ੍ਰਿਪਤ ਰਹੇਗਾ ਹੀ ਮਾਇਆ ਦੀ ਭੁੱਖ ਰਹਦੀ ਹੋਈ ਹੋਰ ਕੋਈ ਦੁਨਿਆਵੀ ਭੁੱਖ ਹੀ ਉਹਦੀ ਦੁਨਿਆਵੀ ਵਿੜਿਆਈ ਦੀ ਭੁੱਖ ਠੀਕ ਹੈ ਉਹ ਪ੍ਰੈਜ਼ੀਡੈਂਟ ਵੀ ਵਧੀਆ ਹੀ ਹੈ ਸੁਭਜੋਂ ਕੌਣ ਬੜਾ ਬਹਾਇਆ ਬੜਿਆਈ ਉਹਦੇ ਦੀ ਵੀ ਵਧੀਆਈ ਹੁੰਦੀ ਹੈ ਇਸ ਸੰਸਾਰ ਦੇ ਲੋਕ ਜਾਦਾ ਮਿਲੂ ਬਦਲ ਗਈ ਬਈ ਠੀਕ ਨਹੀਂ ਹੈ ਠੀਕ ਹੈ ਜੀ ਸੱਚ ਦੇ ਵਿੱਚ ਮਿਲੂ ਕਹਿਣ ਵੀ ਬੋਲ ਪਾਲਾ ਸੱਚ ਗੁਰਵਾਲੀ ਤਾਂ ਬੋਲ ਨਹੀਂ ਪਾ ਰਹੀ ਦਰਗਾਹ ਤੇ ਚਲੇ ਜਾਂਦਾ ਇਸ ਕਰਕੇ ਜਾ ਸਾਬ ਜਸਦਾ ਚਿਕਾ ਵੀ ਕਰਦੀ ਖੇਡਣੀ ਪਊਗੀ ਜਾ ਸਾਬ ਜਸਦੀ ਜੇ ਭੁੱਖ ਹੈ ਜੇ ਭਾਇ ਦੀ ਜੇ ਤੁਹਾਨੂੰ ਇਹ ਵੀ ਮੇਰੇ ਘਰ ਦੇ ਨਾਲ ਜਵਾਂ ਕਿ ਰਿਸ਼ਤੇਦਾਰੀ ਟੁੱਟ ਜੂਗੀ ਉਹ ਹੋ ਜੂ ਇਹਦੀ ਸੱਚ ਬੋਲਿਆ ਜੀ ਸੱਚ ਬੋਲਣਾ ਤਾਂ ਕਰ ਲਈਦਾ ਜੀ ਬਸ ਠੀਕ ਕਵੀਰ ਕਹਿੰਦਾ ਆਹੇ ਕੌਣ ਕੱਟ ਖਾਟੀ ਰਾਮਕੀ ਤੇ ਚੱਲ ਦੇ ਵੀ ਕਿ ਜੀ ਤੇ ਤੇ ਪੁੱਤ ਰਹੇ ਆ ਭਾਈ ਉਹਨੂੰ ਭੁੱਖੇ ਕੋਲੇ ਨਹੀਂ ਸਰਕਾਰ ਚ ਰਹੇਗੀ ਹਾਂਜੀ ਇਹ ਹਰ ਰਸ ਸਹੀ ਜਾਣਦੇ ਜੋ ਗੁੰਗੇ ਮਠਿਆਈ ਖਾਈ ਦੇਖੋ ਹਰ ਰਸ ਖਾਈ ਉਹ ਜੀ ਦੱਸ ਨਹੀਂ ਸਕਦਾ ਸਭੇ ਹੈ ਉਹਦੇ ਹੱਥ-ਪਾਹ ਪਤਾ ਤਾਂ ਲੱਗਦਾ ਉਹਦਾ ਚਿਹਰਾ ਦੱਸਦਾ ਵੀ ਹੋਇਆ ਮਠਿਆਈ ਖਾਈ ਤੇ ਪਤਾ ਤਾਂ ਲੰਗਾਇਰ ਨੂੰ ਇਹ ਠੀਕ ਹੈ ਜੇ ਆਪ ਦੱਸਿਆ ਨਹੀਂ ਐਕਸਪਲੇਨ ਵੀ ਕੀਤਾ ਜਾ ਸਕਦਾ ਜੋ ਉਹ ਕੰਪਲੈਕਸ ਦਾ ਲਾਰਾ ਤੇ ਜੋ ਹੁੰਦਾ ਪਰ ਉਹ ਉਹਦੇ ਬਾਰੇ ਬਹੁਤ ਕੁਝ ਦੱਸਿਆ ਜਾ ਸਕਦਾ ਉਹ ਨਹੀਂ ਦੱਸਿਆ ਜਾ ਸਕਦਾ ਕੀ ਉਹਦੇ ਬਾਰੇ ਦੱਸਿਆ ਜਾ ਸਕਦਾ ਜਿਹੜੀ ਜੀ ਸਾਡੇ ਕੋਲ ਇੱਥੇ ਹੈਦੀ ਅਸੀਂ ਦੇਖੀ ਦੁਨੀਆਂ ਦੇਖੀ ਨਹੀਂ ਜਿਹਨਾਂ ਨੂੰ ਦੱਸਦੇ ਨੇ ਕੰਪਲੈਕਸ ਨੇ ਵੀ ਦੇਖੀ ਚਲੋ ਅਰੇ ਲੈ ਲੋ ਕੋਈ ਨਹੀਂ ਹੋਰ ਤਾਂ ਜੀ ਜੇ ਤਕੌਣ ਹੋਵੇ ਬੇਤਨ ਹੁਣ ਕੱਢ ਕੇ ਦਿਖਾ ਦਈਏ ਭਾਈ ਲੈ ਲੈ ਲੋ ਦੇਖ ਲੋ ਫਿਰ ਬਾਰੇ ਤਾਂ ਬਾਰੇ ਦੱਸਿਆ ਹੋਇਆ ਇਹ ਗਿਆਨ ਹੈ ਦੇ ਬਾਰੇ ਜੋ ਕਿਹਾ ਹੋਇਆ ਗਿਆਨ ਹੈ ਹੈ ਜੇ ਇਹਨੂੰ ਲਾਉਂਦੇ ਸੀ ਹੁਕਮ ਦਾ ਗਿਆਨ ਕਰਾਇਆ ਹੋਕਮਾਂ ਸਾਡੀਆਂ ਦੇ ਬੁੱਝੇ ਹੋਏ ਬੁੱਝਾਣ ਦੇ ਤੁਰ ਕੋਕਾ ਜੋ ਹੋ ਰਿਹਾ ਹੈ ਸੰਸਾਰ ਦੇ ਸਭ ਹੋਕਮ ਰਿਹਾ ਹੈ ਗੁਰ ਪੂਰੇ ਹਰ ਪ੍ਰਭ ਸੇਵਿਆ ਮਨ ਵਜੀਵਾਦਾਈ ਜੋ ਹਰ ਦੇ ਪਾਣੀ ਚੱਲ ਪੇ ਸੇਵਿਆ ਦਾ ਮਤਲਬ ਹੈ ਉਹਦੇ ਪਾਣੀ ਚੱਲਦੇ ਨੇ ਦੇ ਮਨ ਦੇ ਵਿੱਚ ਕੀ ਹੈ ਵਾਦਾ ਵਦਾਈ ਵਾਦਾ ਵਾਦਾ ਹੋਈ ਜਾਂਦਾ ਗਿਆਨ ਚ ਵਜੀ ਵਦਾਈ ਦਾ ਮਤਲਬ ਹੈ ਉਹਦੇ ਚ ਉਹਨਾ ਵਾਦਾ ਹੋ ਰਿਹਾ ਅਥਾ ਵਾਦਾ ਹੋਤਾ ਹੈ ਜਰ ਵਾਦ ਲਗਾ ਦਾਲ ਠੀਕ ਹੈ ਜਿਹੜੇ ਚ ਬੰਦ ਆਇਆ ਹਾਂਜੀ ਜਿਹੜੇ ਚ ਬੰਦ ਵਾਦ ਕਹਿੰਦੇ ਉਹ ਦੁਗਣਾ ਨਹੀਂ ਸਿੱਧਾ ਚਵੰਗਣੇ ਲਿਖ ਦਿੰਦਾ ਹੈ ਤੇ ਇਥੇ ਵੀ ਲਿਖਦੇ ਆ ਗੁਰਪੂਰ ਹੈ ਹਰ ਪ੍ਰਭ ਸੇਵਿਆ ਪੂਰ ਗਿਆਨ ਨਾਲ ਠੀਕ ਹੈ ਜੀ ਸੇਵਾ ਤੋਂ ਪੂਰੇ ਗਿਆਨ ਤੋਂ ਮੈਨੂੰ ਪਹਿਲਾਂ ਜੇ ਕੱਟ ਗਿਆਨ ਦੀ ਬੱਤ ਥੋੜੀ ਸੇਵ ਗਵਾਈ ਹੈ ਇਹ ਦੂਈ ਪੰਕਤੀ ਇਹਦੇ ਖਿਲਾਫ ਹੈ ਜੇ ਮਤਾਂ ਜੋ ਪੂਰੀ ਨਹੀਂ ਨਾ ਹੈ ਹਾਂਜੀ ਤਾਂ ਵੱਦਦੀ ਪੱਕਾ ਪੱਕੇ ਆਰ ਤੇ ਜੂਆ ਪੱਕਾ ਕਰਦਾ ਪੱਕਾ ਫੇਰੀ ਪਾਣੀ ਤੋਂ ਵਾ ਠੀਕ ਹੈ ਜੀ ਥੋੜੀ ਮੱਤਾ ਠੀਕ ਹੈ ਜੀ ਉਹ ਬਹਾਲਿਆ ਕਰਕੇ ਸੇਵਾ ਕਰਦਾ ਉਹ ਸੇਵਾ ਦਵਾਲਦਾ ਉਹ ਉਦੀ ਰਹੀ ਹੁੰਦੀ ਸੇਵਾ